ਚਲੋਕ ਤੇਕਤ ਜਲ ਮਹਿ ਜੀਵ ਮੀਨੰਗ ਮਹਿ ਤਿਆਗ ਚਾਤਰਿਕ ਮੇਗ ਮੰਡਲਹਿ ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸ਼ਮ ਬਾਸਨ ਰਕਤ ਜਲੰ ਸਹ ਜੀਵ ਮੀਨੰ ਜੇ ਮੱਛੀ ਰੂਪੀ ਜੀਵ ਹੈ ਜਾਂ ਜਲ ਦਾ ਤਿਆਗ ਨਹੀਂ ਕਰਦੀ ਜਲ ਨੂੰ ਛੱਡਦੀ ਉਹ ਅੱਜ ਤੋਂ ਬਾਹਰ ਨਹੀਂ ਜਾਂਦੇ ਉਹਨੂੰ ਪਤਾ ਜਲ ਤੋਂ ਬਾਹਰ ਜਾਊ ਤਾਂ ਮੇਰੀ ਮੌਤ ਹੈ ਜਲ ਇਹ ਉਹਦਾ ਜੀਵਨ ਹੈ ਮੈਂ ਪਿਆਰ ਕਮੇਰ ਦੇ ਥੱਲੇ ਹੀ ਮੈਂ ਰਹਾਂ ਚਾਹੁੰਦਾ ਹੈ بارش ਹੁੰਦੀ ਰਹੇ ਗੁੰਨਾ ਬਾਂਦੀ ਹੁੰਦੀ ਰਹੇ ਮੈਨੂੰ ਪਾਣੀ ਮਿਲਦਾ ਰਹੇ ਉਹਨੇ ਤਿਆਗਦਾ ਦੂਰ ਨਹੀਂ ਪੈ ਜਾਉ ਤੇ ਅਲੱਗ ਨਹੀਂ ਹੁੰਦਾ ਚਾਹਤ ਮੰਡਲ ਨੂੰ ਨਹੀਂ ਤਿਆਗਦਾ ਮੈਂ ਪਾਣੀ ਨੂੰ ਹੀ ਤਿਆਗਦੀ ਕਹਿੰਦਾ ਮਤਲਬ ਇਹ ਵੇ ਨਹੀਂ 나ਦ ਵੀ ਬਾਣੀ ਹੈ। ਕੁਰੰਕ ਉਹਦੇ ਨਾਲ ਇਸ ਤਰੀਕੇ ਨਾਲ ਜੁੜ ਕੇ ਖਿੱਚਿਆ ਚੱਲਿਆ ਹੁੰਦਾ ਹੈ। ਜਦੋਂ ਉਹ ਨੂੰ ਸੁਣ ਰਹੀ ਹੈ ਖਿੱਚਿਆ ਚੱਲਿਆ ਹੁੰਦਾ ਹੈ। ਕੁਰੰਕ ਨੂੰ ਵਿਰਗ ਰੂਪ ਖਿੱਚ ਪਾਉਂਦਾ ਅਲ ਬੇਜਾ ਕੁਸਮ ਹੈ। ਇਹਨੇ ਪੱਕ ਜਿਹੜਾ ਹੈ ਫੁੱਲ ਦੀ ਬਾਸਨਾ ਨਾਲ ਜੁੜ ਕੇ ਉਹਦੇ ਨਾਲ ਖਿੱਚਿਆ ਚੱਲਿਆ ਹੁੰਦਾ। ਫੁੱਲ ਦੀ ਬਾਸਨਾ ਜਿਵੇਂ ਖਿੱਚੀ ਹੈ, ਐਵੇਂ ਜਿਹੜੀ ਹੈ 나ਦ ਕੁਰੰਕ ਨੂੰ ਇਹਨੂੰ ਖਿੱਚਦਾ ਵਿਰਗ ਨੂੰ। ਵਾਣ ਬੇਦੰਤ ਕੁਰੰਕ ਨਾਦੰ ਕੁਰੰਕ ਹਿਰਨੂ ਕਹਿੰਦੇ ਹੈ ਜੀ 12 ਹੰਗਰੂ ਕਹਿੰਦੇ ਨੇ ਹਿਰਨੂ ਵੀ ਕਹਿੰਦੇ ਨੇ 12 ਸਿੰਘਾ ਹੁੰਦਾ ਇੱਕ ਉਹ ਕਹਿੰਦੇ ਨੇ ਮੇਰੇ ਕੋ ਵਾਸਨਾ ਇਹ ਪੌਰੇ ਦੀ ਗੱਲ ਹੈ ਜੀ ਅਲ ਪੌਰੇ ਨੂੰ ਕਹਿੰਦੇ ਨੇ ਅਲੀ ਅੱਛਾ ਜੀ ਫੁੱਲ ਨੂੰ ਹੋਈ ਫੁੱਲ ਦੀ ਵਾਸਨਾ ਨਾਲ ਜਿਵੇਂ ਦਾ ਉਹਦੇ ਤੇ ਮਸਤ ਹੋਇਆ ਹੋਇਆ ਮਸਤ ਹੋਇਆ ਖਿੱਚਿਆ ਉਹਦੇ ਨਾਲ ਠੀਕ ਹੈ ਜੀ ਚਰਨ ਕਮਲ ਰੰਚਿਤ ਸੰਤ ਹੈ ਨਾਨਕ ਆਨ ਨ ਰੁਚਤੇ ਇਸੇ ਤਰੀਕੇ ਨਾਲ ਚਰਨ ਕਮਲਾਂ ਨਾਲ ਜਿਹੜੇ ਨਾਲ ਜੁੜੇ ਰਹਿੰਦੇ ਨੇ ਹੋਰ ਉਹਨਾਂ ਨੂੰ ਕੋਈ ਇੱਛਾ ਨਹੀਂ ਹੁੰਦੀ ਹੋਰ ਕੋਈ ਰੁਚੀ ਨਹੀਂ ਰਹਿੰਦੀ ਜਿਵੇਂ ਭੌਰੇ ਉੱਤੇ ਬਹਿ ਜਾ ਬਸ ਸਭ ਸੰਸਾਰ ਜਾਂਦਾ ਐਵੇਂ ਚਰਨ ਕਮਲਾਂ ਨਾਲ ਜੁੜ ਕੇ ਅੰਤਰਾਤਮਾ ਜੁੜ ਕੇ ਜਿਹੜੇ ਜੋ ਜਾਂਦਾ ਸਭ ਸਾਰੇ ਭੁੱਲ ਜਾਂਦੇ ਗੁਰਸਿੱਖ ਗੁਰਮਖੀ ਹੈ ਸੰਤਾਂ ਦਾ ਨੂੰ ਅੱਛਾ ਜੀ ਆਨ ਕਿਸੇ ਹੋਰ ਮਾਇਆ ਨੂੰ ਛੱਡ ਕੇ ਉਹਨਾਂ ਦਾ ਜਿੰਨਾ ਧਿਆਨ ਹੈ ਉਹ ਸਾਰਾ ਚੇਤਨ ਵੱਲ ਹੀ ਹਾਂਜੀ ਹਾਂਜੀ ਠੀਕ ਹੈ ਜੀ ਮੁਖ ਦਿਖਾਉ ਪਲਕ ਛੱਡ ਆਨ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ ਮੋਖਣੇ ਖਾਉ ਮੁਖ ਮੈਨੂੰ ਦਿਖਾ ਦੇ ਮੈਂ ਸਾਡ ਤੇਰੇ ਜੇ ਰੱਖੂਗਾ ਫਿਰ ਜੀਵਨ ਸੰਨ ਬਤੇਸਤਾਲੀ ਹਰਨਾਨਕ ਸੰਤਾਂ ਵਿੱਚ ਉਹ ਜੀਵਨ ਸੰਗ ਮੈਂ ਤੇਰੇ ਨਾਲ ਜੁੜ ਜਾਣਾ ਹੈ ਜੀਵਨ ਸਦਾ ਜੀਵਨ ਕਿਸਣੀ ਹਰਨਾਨਕ ਸੰਤਾਂ ਵਿੱਚ ਸੰਤਾਂ ਨੇ ਕਿਤੋਂ ਹੈ ਹਰੀ ਹਰੀ ਹੀ ਜੀਵਨ ਸੰਤਾਂ ਦਾ ਹਰਦੇ ਚੱਲਣਾ ਨਾਲ ਜੁੜ ਕੇ ਸੰਤ ਸਦਾ ਲਈ ਸਰਜੀਵਨ ਹੋ ਜਾਂਦਾ ਸਦਾ ਲਈ ਆਪਣਾ ਤੇਰੇ ਚੱਲਣਾ ਤੇ ਪਰੇ ਕਰਦਾ ਨਹੀਂ ਸੰਤ ਨਹੀਂ ਕਰਦੇ ਹੁੰਦੇ ਸੰਤਾਂ ਵਿੱਚ ਇਹੀ ਹੁੰਦਾ ਹਾਂਜੀ ਠੀਕ ਹੈ ਕਹਿਣਾ ਇਹ ਚਾਹੁੰਦੇ ਜਿਵੇਂ ਜਲ ਨਾਲ ਮੱਛੀ ਦਾ ਸੰਗਮ ਪਾਣੀ ਦੇ ਨਾਲ ਮੇਗ ਨਾਲ ਚਾਤ੍ਰਿਕ ਬਾ ਹੈਗਾ ਇਸ ਤਰ੍ਹਾਂ ਹੀ ਸੰਤਾਂ ਦਾ ਜਿਹੜਾ ਸੰਗਮ ਹੈ ਉਹ ਆਪਣੇ ਨਾਲ ਹਰ ਨਾਲ ਆਪਣੇ ਮੂਰ ਨਾਲ ਹੈ ਠੀਕ ਇਕੋ ਉਤਲੇ ਸ਼ਲੋਕ ਹੀ ਸੰਮਪਤ ਕੀਤੇ ਨੇ ਖੋਲ ਕੇ ਦੱਸੇ ਨੇ ਪੌੜੀ ਵਿੱਚ ਹਾਂਜੀ ਜਿਵੇਂ ਮੱਛੀ ਪਾਣੀ ਦੇ ਬਿਨਾਂ ਕਿਉਂ ਜੀਵਨ ਪਾਵਾ ਜਿੰਤਾ ਕੰਮ ਰੋ ਨਹੀਂ ਰਹਿ ਸਕਦਾ ਜਦੋਂ ਪਾਣੀ ਦੇ ਬਿਨਾਂ ਮੱਛੀ ਜੀ ਰਹਿ ਸਕਦੀ ਉਹਨੂੰ ਇਹਨਾਂ ਗਿਆਨ ਹੈ ਕਿ ਉਹ ਵੀ ਹੈ ਗੂਂਦ ਬਣਾ ਹੋਣਾ ਛਾਤਰ ਕਰ ਤ੍ਰਿਪਤਾਵ ਗੂਂਦ ਬਿਨਾਂ ਛਾਤਰ ਜਿਹੜਾ ਭਾਵੀ ਹੈ ਉਹਨੂੰ ਤ੍ਰਿਪਤ ਨਹੀਂ ਹੋ ਸਕਦਾ ਉਨਾ ਹੋਰੋ ਵੀ ਗਿਆਨ ਹਾਂਜੀ ਨਾਦ ਕੁਰੰਕਹਿ ਵਿਦਿਆ ਮਨ ਸੁਖੁ ੁਟਤਾਵੈ ਲੋਭੀ Kusum Baska ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਨਾਦ ਕੁਰੰਕੇ ਵਿਦਿਆ ਕੰਧੁ ਖੁਟਤਾਵੈ ਇਹ ਕੁਰਾਨ ਤੋਂ ਸੁਣ ਲਵੇ ਤਾਂ ਉਦੋਂ ਉਹ ਭੱਜਿਆ ਜਾਂਦਾ ਉਹ ਵੱਲ ਫਿੱਕਿਆ ਚਲਾ ਪਵਰ ਲੋਬੀ ਕੁਸਮ ਬਾਸ ਕਾ ਮਿਲ ਆਪ ਬਣ ਗਿਆ ਪਵਨ ਨੂੰ ਪੋਰੇ ਨੂੰ ਕੋਈ ਨਹੀਂ ਵਾਸ਼ਨਾ ਦਾ ਇਨਾ ਲੋਭ ਹੈ ਕਿ ਮਿਲ ਕੇ ਉਹਦੇ ਨਾਲ ਜੁੜ ਕੇ ਚਾਹੇ ਮਾਰਿਆ ਜਾਵੇ ਇਸੇ ਤਰੀਕੇ ਨਾਲ ਸੰਤ ਜਨਾ ਹਰ ਹਾਲ ਪ੍ਰੀਤ ਉਹ ਦਰਸ਼ਨ ਦੇਖ ਤੇ ਹੀ ਆਨੰਦ ਰਹਿੰਦਾ ਹੈ ਉਹਨਾਂ ਨੂੰ ਆਨੰਦ ਮਿਲਦਾ ਰਹਿੰਦਾ ਉਤਲੇ ਪ੍ਰਮਾਨ ਦੇ ਕੇ ਸੰਤ ਜਨਾਂ ਦੀ ਹਰ ਨਾਲ ਇੱਕੇ ਕਿਸਮ ਦੀ ਪ੍ਰੀਤ ਹੈ ਉਹਦੇ ਦਰਸ਼ਨ ਨਾਲ ਉਹ ਆਨੰਦ ਰਹਿੰਦੇ ਨੇ ਠੀਕ ਹੈ ਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ